ਅਥ ਕਰ ਪਕਰ ਖੇਲੋ ਕਥ ਨੰਗਰਾਸ ਮੰਡਲ ਸੁਈਆ ਪ੍ਰਾਤ ਪੈ ਹਰ ਜੂ ਪਦ ਕੈ ਗ੍ਰਹਿ ਧਾਇ ਗੈ ਉਠ ਠੋਰ ਕਹਾ ਕੋ ਫੂਲ ਰਹੇ ਜੇ ਫੂਲ ਭਲੀ ਬਿਦ ਤੀਰ ਬਹੈ ਜਮਨਾ ਸੁ ਤਹਾ ਕੋ ਖੇਲ ਤਹੈ ਸੋ ਪਾਂਤ ਭਲੀ ਕਬ ਸ਼ਾਮ ਕਹੈ ਕਛ ਤਰਾਸ ਨਾ ਤਾ ਕੋ ਸੰਗ ਬਜਾਵਤ ਹੈ ਮੁਰਲੀ ਸੋ ਗੂੰਗਨ ਕੇ ਮਿਸ ਬਾਰਨੀਆਂ ਕੋ रास कथा कवि श्याम कहे सुन कै ब्रखपान सुता सुतहाई जा मुग सुदन सापत सो जेहके तन कंचन सी छवि छाई जाकी प्रभा कवि दे सबै सो ता मै रजै बरनी दह जाई श्याम की सोह सो गोपन ते सुन कै तरनी हरनी जिम ढ़ाई इक वित शीत तरह सारी ब्रखपान की कुमारी जासी की मनोबारी ऐसी रची है ना को ਨੰਬਾ ਉਰਬਸੀ ਔਰ ਸਚੀ ਸੋ ਸੋਮਦੋਦਰੀ ਪੈ ਐਸੀ ਪ੍ਰਵਾਕਾ ਕੀ ਜਗ ਬੀਜ ਨਾ ਕਛੂ ਪਈ ਮੋਤਨ ਕੇ ਹਾਰ ਗਰੇ ਡਾਰ ਰੁਚ ਸੋ ਸੁਧਾਰ ਖਾਨ ਜੂ ਪੈ ਚਲੀ ਕਬ ਸਿਆਮ ਰਸ ਕੇ ਲਈ ਸੇਤੈ ਸਾਜ ਸਾਜ ਚਰੀ ਸਾਵਰੇ ਕੀ ਪ੍ਰੀਤ ਕਾਜ ਚਾਂਦਨੀ ਮਹਿ ਰਾਦਾ ਮਾਨੋ ਚਾਂਦਨੀ ਸੀ ਹੋਇ ਗਈ ਸੋਇਆ ਅੰਜਨ ਹਾਂ ਸੋ ਧਾਰ ਭਲੇ ਪਟ ਭੂਖਣ ਅੰਗ ਸੋ ਧਾਰ ਚਲੀ ਜਨ ਦੂਸਰ ਚੰਦਰ ਕਲਾ ਪ੍ਰਗਟੀ ਜਨ ਅਰਜਤ ਕੰਜਕੀ ਸੇਤਕਲੀ ਹਰ ਕੇ ਭਗ ਭੇਟਨ ਕਾ ਚਲੀ ਕਬ ਸ਼ਾਮ ਕਹ ਸੰਗ ਰਾਦੇ ਅਲੀ ਜਨ ਜੋਤ ਤਰੀਨ ਗਵਰਨ ਤੇ ਇਹ ਚੰਦ ਕੀ ਚਾਂਦਨੀ ਬਾਲ ਭਲੀ ਸੁਈਆ ਕਾਨ ਸੋ ਪ੍ਰੀਤ ਵਢੀ ਤਹਿ ਮਨ ਮੈਂ ਅਤ ਹੀ ਨੈ ਨੈ ਘਟੀ ਹੈ रूप सची ਪੈ पै ਤੈ ਮਨ मन त्रियं ते नह नय कुटियै ਰਾਸ में खेलन ਕਾ ਚਲੀ साई साज सबै क ਨਟੀ नटी है सुंदर गवर्ण ਖਨ ਵੈ मनोराद का चंद्रकला प्रगटी है ब्रह्मा पिख कै जे रीज रहयो जे को दिख कै शिव ध्यान छुट्टा है जा निरखे रति रीज रही रति के पद को पिख मान टूटता है कोकिल कंठ चुराए लियो जिन भवन को सब पाव लुटा है गुवर्ण के कण बीज बिराजत राधा का महानो बिज छटा है कान के पूजन दिन चली ली ब्रज सुता सब साज सजै जे को पिख कह मन मोहे रहय कवि श्याम कह दुदी शीस रजै जिन अंग प्रभा कवि दे सबै सो अंग धरे त्रिय राज ਜੇ ਕੋ ਪਿਖ ਕੰਦਰ ਪ੍ਰੀਤ ਰਹਿ ਜੇ ਕੋ ਪਿਖ ਚਾਂਦਨੀ ਚੰਦ ਲਜਾਇ ਸੋਈਆ ਸਿਤ ਸੁੰਦਰ ਸਾਜ ਸਵੇ ਸਜ ਕੈ ਵਿਰਗ ਭਾਂਤ ਸੁਤਾ ਇਹ ਭਾਂਤ ਬਣੀ ਮੁਖ ਰਾਜ ਤੇ ਸੁਧ ਨਿਸਾ ਪਦ ਸੋ ਜਿਸ ਅਤ ਚਾਂਦਨੀ ਰੂਪ ਕਨੀ ਰਸ ਕੋ ਕਰ ਰਾਦਕਾ ਕੋਪ ਚਲੀ ਮਨ ਸਾਜ ਸੋ ਸਾਜ ਕੈ ਮੈਨ ਅਨੀ ਤਿਹ ਪੀਖ ਪਏ ਭਗਵਾਨ ਖੁਸੀ ਸੋ ਤ੍ਰੀ ਤੇ ਤ੍ਰੀ ਰਾਜ ਗਨੀ ਰਾਧਾ ਬਾਜ ਗੋਪਨ ਸੋ ਸੋਈਆ ਬ੍ਰਿਜ ਭਾਂਤ ਸੁਤਾ ਹਰ ਪੇ ਹਸੀਏ ਭਾਂਤ ਕਹੋ ਸੰਗਵਾਰਨ ਕੈ ਸਮਧਾਰ ਮਧਾਂਤ ਨਿਕਾਸ ਕੀ ਦੋ ਸਮ ਚੰਦ ਮੁਖੀ ਬ੍ਰਿਜ ਬਾਰਨ ਕੈ ਹਮ ਓ ਹਰ ਜੀ ਅਥ ਹੋਠ ਪਰ ਰਸ ਹੀ ਕੇ ਸੋ ਬੀਜ ਮਹਾਰਾਨ ਕੈ ਤਜ ਕੈ ਸਭ ਸੰਕ ਸੰਕ ਪਿਰੋ ਸੰਗ ਐਸੇ ਕਹੋ ਹਸ ਗਵਾਰਨ ਕੈ आसिबात कहि संग ਗੋਪਨ के कव्य श्याम कहै ब्रज भान जई मनु आप ही ते ब्रह्मा सुरती रोचे सो ए रूप अनूपमई हर को देख कै निहुर आई गई उपमा तहकी कवे भाख दई मनु जोवन भार सहो न गयो ते तौ ब्रज भामन नीची ਸਭ ਹੀ ਮੇਰੇ ਰਾਸ ਕੋ ਖੇਲ ਕਰੈ ਸਭ ਗੁਆਰਮ ਯਾਂ ਜਤ ਹੀ ਤੇ ਤੇ ਬ੍ਰਿਖ ਭਾਣ ਸੁਤਾ ਸੁਸਾਜ ਸਜੇ ਸੋ ਬਿਰਾਜਿਤ ਸਾਜ ਸਭੈ ਸਿਤ ਤੇ ਹੁਨ ਊਜ ਪ੍ਰਵਾਹ ਆਥੀ تیر ਕੀ ਕਬ ਸ਼ਾਮ ਵਿਚਾਰ ਕਹੀ ਚਿਤ ਤੇ ਉਤ ਤੇ ਕਨ ਸ਼ਾਮ ਬਿਰਾਜਤ ਹੈ ਹਰਿ ਰਾਜ ਕਾ ਬਿਦਲ ਤਾਇਤ ਤੇ ਸੁਈਆ ਬ੍ਰਿਖ ਭਾਣ ਸੁਤਾ ਤੇ ਖੇਤ ਰਾਸ ਸੋ ਸਖਿਆ ਸੰਗ ਲੈ ਉਤ ਚੰਦਰਪਗਾ ਸਭ ਗਵਾਰਨ ਕੋ ਤਨ ਚੰਦਨ ਕੇ ਸੰਗ ਲੇਪ ਹੈ ਕੈ ਜਿਨ ਕੇ ਮ੍ਰਿਗ ਸੇ ਦ੍ਰਿਗ ਸੁੰਦਰ ਰਾਜਤ ਛਾਜਤ ਕਾਮਿ ਨਿ ਪੈ ਜਿਨ ਗੈ ਮਨ ਜੋ ਉਪਜੀ ਉਪਮਾਨ ਚੰਦ ਕੀ ਚਾਂਦਨੀ ਜੋ ਮੈ ਚੰਦਰਪਗਾ ਬਾਦਰਾ ਦੇ ਪ੍ਰਤੀ ਸੁਵਈਆ ਬਤਿਆ ਫੁਨ ਚੰਦਰਪਗਾ ਮੁਖਤੇ ਇਹ ਭਾਂਤ ਕਹੀ ਬਿਰਖ ਭਾਨ ਸੁਤਾਸੋ ਆਵਹੁ ਖੇਲ ਕਰੈ ਹਰ ਸੋ ਹਮਨਾਖ ਖੇਲ ਕਰੋ ਤੁਮ ਕਾਸੋ ਤਾ ਕੀ ਪ੍ਰਭਾ ਕਬ ਸਿਆਮ ਕਹੈ ਉਪਜੀ ਹੈ ਜੋ ਆਪਣੇ ਮਨ ਸੋ ਗਾਰਨ ਜੋ ਰਈਨ ਕੀ ਛਾਪੀ ਦੁਤ ਰਾਜ ਕਾ ਚੰਦਰ ਕਲਾਸੋ ਰਾਧੇ ਬਾਜ ਸੁਈਆ ਸੁਨ ਚੰਦਰ ਭਗਾ ਕੀ ਸਵੇ ਬਤੀਆ ਬ੍ਰਿਖ ਸੁਤਾ ਤਵ ਕਯੋ ਹੈ ਯਾਹੀ ਕੇ ਹੀਤ ਸੁਨੋ ਸਜਨੀ ਹਮ ਕੋ ਉਪਹਾਸ ਸਹਿ ਹੋਐ ਸਰਉਨ ਰਮੈ ਸੁਨਿ ਕਥਾ ਤਬ ਹੀ ਮਨ ਮੈ ਹਮ ਧਿਆਨ ਗਯੋ ਹੈ श्याम कहै अखियां पिख कै हमरे मन को तन मोहे रहयो है तब चंद्र भगाए पांत कहो सजनी हमरी बतिया सुन लीजै देखो श्याम बिराजत है जेहके मुख के पिखे पुनि जीजै जाके करे मित होए खुशी सुनिए उठ कै सो कार्य कीजै ताही ते राधे कहो तुम सो अब विचार भई तो विचार ना कीजै कव्यो वात कान के भेटन पाए चली बतिया सुन चंद्र पगा कैसे मानौ नाग सुता ए सुन्दर त्याग चली गृह पत्र धरै से गुवारन मंदिर ते निकसी कव श्याम कहे उपमा ते ऐसे मानो श्याम कनाय तज कह प्रगटी है सो बिजली दति जैसे ਰਾਸ ਹੈ ਕੀ ਰਤਨਾ ਭਗਵਾਨ ਕਹੈ ਕਲ ਸਿਆਮ ਚਿਤ੍ਰ ਕਰੀ ਹੈ ਰਾਜਤ ਹੈ ਤਰੇ ਜਮਨਾ ਅਤ ਹੀ ਤਾ ਚਾਂਦਨੀ ਚੰਦ ਕਰੀ ਹੈ ਛੇਤ ਪਟੈ ਸੰਗ ਰਾਜਤ ਗਵਾਰਨ ਤਾ ਕੀ ਪ੍ਰਵਾ ਕਬਨੇ ਸੋ ਕਰੀ ਹੈ ਮਨਉ ਰਾਸ ਬਗੀਚਨ ਮੈਂ ਇਹ ਫੂਲਨ ਕੀ ਫੁਲਵਾਰ ਜਰੀ ਹੈ ਸਵਿਆ चंद्र पगाहु को मान कहो मृग भाण सुता हरि पान लागी मैन सी सुंदर मूर्त देख कै ताही के देख बेको मनुरागी सोवत थी जन लाज की नींद मैं लाज की नींद तजी अब जागी जाको मुनी नहि अंत लहै ए ताही सो खेल कर आया बडभागी कौन आवाज रादा सो दोहरा कृष्ण राद का संग कहो अति विहस कै बात खे लो गावो प्रेम सो सुन सम कंचन गाथ कृष्ण बात सुन राद का अतिहि बहस कह तीत रास बिखए गावन लगी ग्वालन सो मिल गीत सुइया चंद्र पगाए अर चंद्रमुखी मिलकै ब्रकबान सुता संग गावै सारंग शुद्ध मलार बिलावल पीतर तान बसावै ਰੀਜ ਰਹੀ ਬ੍ਰਿਧ ਹੂੰ ਕੀ ਤ੍ਰਿਆਸ ਹੋ ਰੀਜ ਰਹੈ ਧੁਨ ਜੋ ਸੁਨ ਪਾਵੇ ਛੋ ਸੁਨ ਕਹਿ ਇਨ ਪੈ ਖਿਤ ਬਨ ਤਿਆਗ ਮਰਗੀ ਮਰਗੀ ਆਓ ਚਲ ਆਵੇ ਤਿਨ ਸਿੰਧਰ ਮੰਗਦਈ ਸਿਰ ਪੈ ਰਸ ਕੋ ਤਿਨ ਸੋ ਅਤ ਹੀ ਮਨ ਭੀਨੋ ਬੇਸਰ ਸੋ ਕੰਠ ਸ੍ਰੀ ਅਰ ਸ੍ਰੀ ਹੂੰ ਕੋ ਸਾਜ ਨਵੀਨੋ ਭੂਖਣ ਅੰਗ ਸਬੈ ਸਾਜ ਸੁੰਦਰ ਆਂਖਨ ਭੀਤਰ ਕਾਜਰ ਦੀਨੋ ਤਾਹੀ ਸੋਤੇ ਕਬਿ ਸ਼ਾਮ ਕਹੇ ਭਗਵਾਨ ਕੋ ਚਿਤ ਚੁਰਾਏ ਕੈ ਲੀਨੋ ਸੋਈਆ ਚੰਦ ਕੀ ਚਾਦਨੀ ਮੈਂ ਕਬਿ ਸ਼ਾਮ ਜਬੈ ਹਰ ਖੇਲਨ ਰਾਸ ਲਗਿਓ ਹੈ ਰਾਧੇ ਕੋ ਆਨਨ ਸੁੰਦਰ ਭੇਕੈ ਝਾਂ ਸੋ ਧਾਈ ਕੇ ਬੀਜ ਪਗਿਓ ਹੈ ਹਰ ਕੋ ਤਿਨ ਚਿਤ ਚੁਰਾਏ ਲਿਓ ਸੋ ਕਿਦੋ ਕਬ ਕੋ ਮਨ ਯੋ ਉਮਗੈ ਹੋਇ ਨੈਨਨ ਕੋ ਰਸ ਦੇ ਪਿਲਵਾ ਬ੍ਰਿਖ ਭਾਂ ਠਗੀ ਭਗਵਾਨ ਠਗਿਓ ਹੈ ਜਿਹ ਕੋ ਪਿਖ ਕੈ ਮੁਖ ਮਾਨ ਲਜਾਇ ਕੋ ਦੇਖ ਕੈ ਮੁਖ ਚੰਦਰ ਲਜਾਇ ਕਵ ਸ਼ਿਆਮ ਕਹੈ ਸੋ ਖੇਲਤ ਹੈ ਸੰਗ ਕਨਰ ਕੇ ਸੋ ਸਜੈ ਸੋ ਸੂਰਤਵੰਤਰਤੀ ਬ੍ਰਹਮਾ ਕਰ ਕੈ ਅਤਹੀ ਰੁਜ ਕੈ ਨ ਕਜੈ ਮਨ ਮਾਲ ਕੇ ਵਿੱਚ ਬਿਰਾਜਤ ਜਿਉ ਤਿੰਨ ਤ੍ਰੀਯਨ ਮੈਂ ਰਾਜ ਰਜੈ ਗਾਏ ਕੈ ਗੀਤ ਭਲੀ ਬਿਦ ਸੁੰਦਰ ਰੀਜ ਬਜਾਵਤ ਪੀ ਫਿਰ ਤਾਰੀ ਅੰਜਨ ਆਂਡ ਸੁਧਾਰ ਭਲੇ ਪੜ ਸਾਧਨ ਕੇ ਸਜ ਕੈ ਤਾ ਛਭ ਕੀ ਅਤਹੀ ਸੋ ਪ੍ਰਭਾ ਕਵਨਾਇ ਮੁਖ ਤੇ ਇਹ ਭਾਂ ਤੂ ਚਾਰੀ ਮਨਵ ਕਾਨ ਹੀ ਕੇ ਰਸ ਤੇ ਫੂਲ ਰਹੀ ਤ੍ਰਿਯ ਆਨੰਦ ਬਾਰੀ ਸੋਇਆ ਤਾ ਪ੍ਰਭਾ ਕਵ ਸਿਆਮ ਕਹੇ ਜੋ ਰਾਜਤ ਰਾਸ ਬਿਖੈ ਸਖੀਆਂ ਹੈ ਜਾ ਮੁਖ ਉਪਮਾ ਚੰਦਰ ਛਟਾ ਸਮ ਛਾਜਤ ਸੀ ਅਖਿਆ ਹੈ ਤਾਂ ਕੀ ਕਿਦੋ ਅਤੀ ਉਪਮਾ ਕਵਨੈ ਮਨ ਪੀਤਿ ਜੋ ਹੈ ਲੋਗਨ ਕੇ ਮਨ ਕੀ ਹਰਤਾ ਸੋ मुਨੀ ਨਨ ਕੇ ਮਨ ਕੀ ਚਖੀਆਂ ਹੈ ਰੂਪ ਸਚੀ ਇਕ ਚੰਦਰ ਪ੍ਰਭਾ ਇਕ ਮੈਨ ਕਲਾ ਇਕ ਮੈਨ ਕੀ ਮੂਰਤ ਵਿਜ ਛਟਾ ਇਕ ਦਾਰਨ ਦਾੰਤ ਬਰਾਬਰ ਜਾਈ ਕੀ ਹੈ ਨਾ ਕਛੂ ਰਤਮ दामनयो मृगकी मृगलीन शरमाए जसै पिख होत खै चूरत सो कथा कव श्याम कहै सब रीज रही हरकी पिख मूरत विखपान सुता हस बात कहि तिहके संग जो हरंत अगदुम श्याम कहै बतिया हरके संग ऐसे कहि पट को तज राधो रास विखै तुम नाचो जो तज कहतहि मन लाज को बाधो ਤਾ ਮੁਖ ਕੀ ਛਭਿ ਜੋ ਪ੍ਰਗਟਿ ਮਨੁ ਅਭਰਨ ਧੇ ਨਿਕਸਿਓ ਸਾਥ ਯਾਧੋ ਜਿਨ ਕੇ ਸਿਰ ਸੇਂਦਰ ਮਾਗ ਬਿਰਾਜਤ ਪ੍ਰਭਾ ਜਿਨ ਕੇ ਤਨ ਲਹੀਨ ਸਬੈ ਹੁਨ ਲੀਲੇ ਇਕ ਧਰੇ ਸਿਰ ਸੁੰਦਰ ਸਾਜ ਧਰੇ ਇਕ ਲਾਲ ਸਜੇ ਇਕ ਨੀਲੇ ਸਿਆਮ ਕਹੈ ਸੋ ਜੀਜ ਰਹਿ ਪਿਖ ਕਹਿ ਦ੍ਰਿਗ ਕੰਜ ਕੇ ਕਾਨ ਰਸੀਲੇ ਸੋਇਆ ਸਭ ਗੁਵਾਰਨੀਆਂ ਤਾ ਖੇਲਤ ਹੈ ਸੁਭ ਅੰਗਨ ਸੁੰਦਰ ਸਾਜ ਕਈ ਸੋ ਰਾਸ ਬਿਖੈ ਤਾ ਖੇਲਤ ਹੈ ਹਰਿ ਸੋ ਮਨ ਮੈਂ ਅਤਹੀ ਉਮਈ ਕਵ ਸ਼ਾਮ ਕਹੈ ਤਿਨ ਕੀ ਉਪਮਾ ਜੋ ਹੁਦੀ ਤਾ ਗਵਾਰਨ ਰੂਪ ਰਈ ਮਨੋ ਸ਼ਾਮਹਿ ਕੋ ਤਨ ਗੋਰਨ ਪੀਖੈ ਸ਼ਾਮਹਿ ਸੀ ਸਭ ਹੋਏ ਗਈ ਸਵਈਆ ਕੇਲ ਕਹਿ ਰਾਸ ਮਹਿ ਰਹੀ ਕਵ ਸ਼ਾਮ ਕਹੈ ਮਨ ਆਨੰਦ ਕੈ ਕੈ चंद्रमुखी ਮੁਖੀ ਤਨ बाहा से सुंदर बात कहि उमगय क देखत मूरत पी रस के बस आपन ते बडवा हिलखय क ज्यों मृगनी मृग देखत त्यों ब्रख भाण सुता भगवान चितय क ब्रख भाण सुता पख रीज रही अति सुंदर सुंदर कान को अन्न राजत तीर नदी जेह नैन के पावन सो हर को मन मोहे लयो रस की अभिमानन ज्यों रस लोगुण पहुहन लै तन नैनन सैन सो कंज से बानन कान सो प्रीत बढी तिन की ना कटि कषवै बढी सो भई है डार है लाज सबे मन की हर के संग खेलन को उमई है श्याम कह तिनकी उपमा अति ही जोत्रिया अति रूप रही है सुंदर का नरकोपिक कह तन में सब ग्वारन होए गई है सैया नैन मृगी तन कंचन के सम चंद्रमुखी मनोसिंध रजी है जा सम रूप नाराजत है रात्रि रावण त्रिय न और सच्ची है ता महरीज महाकरतार कृपा कट के हर कै सो गछी है ਤਾ ਸੰਗ ਪ੍ਰੀਤ ਕਹੈ ਕਵ ਸ਼ਾਮ ਮਹਾ ਭਗਵਾਨ ਹੈ ਕੀ ਸੋਮਚੀ ਹੈ ਸੋਇਆ ਰਾਗਨ ਔਰ ਸੁਭਾਵਨ ਕੀ ਅਦਗਵਾਰਨ ਕੀ ਤਾਮਾਡ ਪਰੀ ਬ੍ਰਿਧ ਗੀਤਨ ਕੀ ਅਧਿਹਾਸਨ ਸੋ ਯਾ ਖੇਲਤ ਭੀ ਕਈ ਏਕ ਗਰੀ ਗਾਵਤ ਏਕ ਬਜਾਵਤ ਤਾਲ ਕਹੈ ਇਕ ਨਾਚਉ ਆਏ ਹਰੀ ਕਵ ਸ਼ਾਮ ਕਹੈ ਤੇ ਠੌਰ ਵਿਖਐ ਜੇ ਠੌਰ ਵਿਖਐ ਹਰੀ ਰਾਸ ਜਦੁ ਰਾਏ ਕੋ ਆਇ ਸਪਾਇ ਤ੍ਰਿਆ ਸਭ ਖੇਲ ਤਰਾਸ ਵਿਖੇ ਵਿਦਿਆਚੀ 인ਦਰ ਸਵਾਜੇ ਸਿੰਧ ਸੁਤਾ ਜਿਮ ਖੇਲਨ ਕੇ ਹਿਤ ਕਾ ਛੰਕਾ ਛੀ ਕਐ ਇਹ ਕਿੰਨਰ ਕਿਦੋ ਨਾਗਨ ਕੀ ਕਿਦੋ ਤਾਛੀ ਰਾਸ ਵਿਖੇ 임 나ਚਤ ਹੈ ਜਿਮ ਕੇਲ ਕਰੈ ਜਲ ਪੀਤਰ 마ਛੀ ਜਿਹ ਕੇ ਮੁਖ ਦੇਖ ਛਟਾ ਸੁਭ ਸੁੰਦਰ ਮੱਧਿਮ ਲਾਗਤ ਜੋਤ ਸਸੀ ਹੈ ਭਉ ਹਨ ਸੋ ਛਾਜਤ ਹੈ ਮਦਨਾ ਮਨੋ ਤਾਨ ਕਮਾਨ ਕਸੀ ਹੈ ਤਾਹੀ ਕੇ ਆਨੰਦ ਸੁੰਦਰ ਤੇ ਸੁਰ ਰਾਗਾ ਕੀ ਸਭ ਭਾਂਤ ਬਸੀ ਹੈ ਜਿਉ ਮਧ ਬੀਜ ਫਸੈ ਮੱਖੀਆਂ ਮਤ ਕੀ ਇਹ ਭਾਂਤ ਫਸੀ ਹੈ ਸੋਇਆ ਫਿਰ ਸੁੰਦਰ ਆਨੰਦ ਤੇ ਹਰ ਬਿਦ ਸੁੰਦਰ ਸੋਇਕ ਤਾਨ ਬਜਾਇਓ ਸੂਰਠ ਸਾਰੰਗ ਸੁਧ ਮਲਾਰ ਵਿਲਾਵਲ ਕੀ ਸੁਰ ਪੀਤਰ ਗਾਇਓ ਸੋ ਆਪਣੇ ਸੁਨ ਸਰਉਨਨ ਮੈਂ ਬ੍ਰਿਜ ਗਵਾਰ ਨੀ ਆਤਹੀ ਸੁਖ ਪਾਇਓ ਮੁਹਰੇ ਰਹੈ ਬਨਕੇ ਖਾਗੇ ਓਮ੍ਰਿਗ ਰੀਜ ਰਹੈ ਜਿਨਹੂ ਸੁਨੂ ਪਾਇਓ ਸੋਈਆ ਅਹਗਾਵਤ ਗੀਰ ਭਲੇ ਹਰਿ ਜੂ ਕਬ ਸ਼ਾਮ ਕਹੈ ਕਰ ਭਾਵ ਛਬੈ ਮੁਰਲੀ ਜਿਤ ਪੀਤਰ ਰਾਜਤ ਜਿਉ ਓਮ੍ਰਿਗ ਮ੍ਰਿਗ ਬੀਜ ਫਬੈ ਜੇ ਕੋ ਸਭ ਲੋਕ ਨੂੰ ਮੈਂ ਜਸ ਗਾਵਤ ਛੂਟਤ ਹੈ ਤਿੰਤੇ ਨਾ ਕਬੈ ਤਿਨ ਖੇਲਨ ਕੋ ਮਨ ਗੋਪਨ ਕੋ ਛਿਨ ਬੀਚ ਲਿਓ ਗੁਣ ਚੋਰ ਸਬੈ ਸਵਈਆ ਕਬ ਸ਼ਾਮ ਕਹੈ ਉਪਮਾ ਤਿਨ ਕੀ ਦਿਨ ਜੋਬਨ ਰੂਪ ਅਨੂਪ ਗੈ ਹੋਐ ਜਾ ਮੁਖ ਦੇਖ ਆਨੰਦ ਵਢਿਓ ਜੇ ਕੋ ਸੁਨ ਸਰੌਨਨ ਸੋਕ ਦੈ ਹੋਐ ਆਨੰਦ ਕੈ ਬ੍ਰਿਖ ਸੁਤਾ ਹਰ ਕੇ ਸੰਗ ਜਵਾਬ ਸੋ ਐਸ ਕਹਯੋ ਹੈ ਤਾਕੇ ਸੁਨ ਤ੍ਰੀਯਾ ਮੋਹਿ ਰਹੀ ਸੁਨ ਕੈ ਜੇ ਕੋ ਹਰ ਰੀਜ ਰਹਿਓ ਐ ਸਵਈਆ ਗਵਰਨਿਆ ਮਿਲ ਕੈ ਸੰਗਾਨ ਕੇ ਖੇਲਤ ਹੈ ਕਬ ਸਿਆਮ ਸਬੈ ਨਾ ਰਹੀ ਤਿਨ ਕੋ ਸੁਦੇ ਅੰਗਨ ਕੀ ਦਹ ਚੀਰਨ ਕੀ ਤਿਨ ਕੋ ਸੋਤਬੈ ਸੋ ਗਨੋ ਕਹ ਲੋ ਤਿਨ ਕੀ ਉਪਮਾ ਅਤਹੀ ਗਨ ਕਹਿ ਮਨਤਾ ਕੀ ਛਬੈ ਮਨ ਭਾਵਨ ਗਾਵਨ ਕੀ ਚਰਚਾ ਕਛ ਥੋਰੀ ਸੁਨ ਲੇ ਹੋ ਅਬੈ ਕਾਨ ਬਾਜ ਦੋਰਾ ਬਾਤ ਕਹੀ ਤਿਨ ਸੋ ਕ੍ਰਿਸ਼ਨ ਅਤਹੀ ਵਿਹਾਸ ਕਹਿ ਚੀਤ ਮੀਤ ਰਸੈ ਕੀ ਰੀਤ ਸੋ कहो सो गाव हो गीत सोइया बतिया सुन कै सब ग्वालनियां शुभ गावत सुंदर गीत सबै सिंध सुतार करता चीत्रिया इनसी नहीं नाचत इंद्र सबै दिवैया इन के संखेलत है गज को कब श्याम सोदान अपहै चढ़ कै सो विवानन सुंदर मै त्रेते हो दिन राम बलि जगदीत मरयो सो धरयो वद सीला गाय ਗੀਤ गीत पली ਸੋ उन ग्वार ਬੀਜ ਕਰੈ ਰਸ ਲੀਲਾ लीला ਹੈ है ਕੋ को तन श्याम बिराजत ਕੋ को पट पीला खेलत सो संग गोपन के कब श्याम कहै जद राए हटीला बोलत है जागो किलका अर शोर करे चहु रटासी श्याम कहते श्याम की देह रजय अति सुंदर मैन कटासी तापिख कै मन ग्वारन ते उपजी अति ही मनोकोर कटासी तामह यौवृख पाण सुता दम कै मनो सुंदर बिद छटासी सवैया अंजन है जेह आंखन में अर बेसर को जेह भाव नवीनो ਜਾਬੁਕ ਕੀ ਸਭ ਚੰਦ ਪ੍ਰਵਾਹ ਜਸਤਾ ਛਵ ਕੋ ਕਬਨੇ ਸਾਜ ਸਬੈ ਸਜ ਕੈ ਸੁਭ ਸੁੰਦਰ ਭਾਲ ਬਿਖੈ ਬਿੰਦਵਾ ਇਕ ਦੀਨੋ ਦੇਖਤ ਹੀ ਹਰ ਰੀਜ ਰਹੇ ਮਨ ਕੋ ਸਭ ਸੋਗ ਵਿਦਾ ਕਰਦੀਨੋ ਸੋਇਆ ਬ੍ਰਖ ਸੁਤਾ ਸੰਗ ਖੇਲਨ ਕੀ ਹਸ ਕੈ ਹਰ ਸੁੰਦਰ ਬਾਤ ਕਹੈ ਸੁਨ ਏ ਜਿਹ ਕੇ ਮਨ ਆਨੰਦ ਬਾਟ ਜਾ ਸੁਨ ਕੈ ਸਭ ਸੋਗ ਦਹੈ ਤੇਹ ਕਾਉਤਕ ਕਉ ਮਨ ਗੋਪਨ ਕਉ ਕਬ ਸ਼ਾਮ ਕਹੈ ਦਿਖ ਈ ਚਹ ਨਭ ਮੈ ਪੇ ਕੈ ਸੁਰ ਗੰਧਰਵ ਜਾਏ ਚਲਿਓ ਨਹੀਂ ਜਾਏ ਸੋ ਰੀਜ ਰਹਿ ਸੋਇਆ ਕਬ ਸ਼ਾਮ ਕਹੈ ਤੇਹ ਕੀ ਉਪਮਾ ਜਿਹ ਕੇ ਹੁਨ ਉਪਰ ਪੀਤ ਪਿਛੌਰੀ ਤਾਹੀ ਕੇ ਆਵਤ ਹੈ ਚਲ ਕੈ ਢਿਗ ਸੁੰਦਰ ਗਾਵਤ ਸਾring ਗਉਰੀ ਸਾਵਲੀਆਂ ਹਰ ਕੇ ਟਿਗ ਆਏ ਰਹੀ ਅਤ ਰੀਜ ਕਾਵਤ ਦੌਰੀ ਯੋ ਉਪਮਾ ਉਪਜੀ ਲਖ ਫੂਲ ਰਹੀ ਲਵਟਾਏ ਮਨੋ ਤ੍ਰਿਯ ਭੌਰੀ ਸੋਇਆ ਸ਼ਾਮ ਕਹੈ ਤਿਹ ਕੀ ਉਪਮਾ ਜੋ ਦੈ ਕੋ ਰਬ ਬੀਰ ਜਸੀ ਹੈ ਜੋ ਤਪ ਬੀਚ ਬਡੋ ਤਪਿਆ ਰਸ ਬਾਤਨ ਮੈਂ ਅਤਹੀ ਜੋ ਰਸੀ ਹੈ ਜਾਈ ਕੋ ਕੰਠਕਪੋਤ ਸੋ ਹੈ ਜੇ ਭਾ ਮੁਖ ਕੀ ਸਮਝੋ ਸਸੀ ਹੈ ਤਾ ਮ੍ਰਿਗਨੀ ਤ੍ਰਿਯ ਮਾਰਨ ਕਹ ਹਰੀ ਭੌ ਹਨ ਕੀ ਯਰ ਪੰਜ ਕਸੀਐ ਸੋਇਆ ਫਿਰ ਕਹਿ ਗਰੀ ਕੋ ਆਰਨ ਕੇ ਸੰਗੋ ਹੁਨ ਗਾਵਤ ਸਾਰੰਗ ਰਾਮ ਕਲੀ ਹੈ ਗਾਵਤ ਹੈ ਮਨ ਆਨਦ ਕੈ ਬ੍ਰਿਖ ਭਾਨ ਸੁਤਾ ਸੰਗ ਜੂਤ ਅਲੀ ਹੈ ਤਾ ਸੰਗ ਡੋਲਤ ਹੈ ਭਗਵਾਨ ਜੋ ਅਤ ਸੁੰਦਰ ਰਾਦੇ ਭਲੀ ਹੈ ਰਾਜਤ ਹੈ ਜਿਹ ਕੋ ਸਸ ਸੋਖ ਮੁਖ ਛਾਜਤ ਭਾ ਦ੍ਰਿਗ ਕੰਝ ਕਲੀ ਹੈ ਸੋਇਆ ਬ੍ਰਿਖ ਭਾਨ ਸੁਤਾ ਸੰਗ ਬਾਤ ਕਹੀ ਕਬ ਸਿਆਮ ਕਹੈ ਹਰ ਜੂ ਰਸ ਵਾਰੇ ਜਾ ਮੁਖ ਕੀ ਸਮਚੰਦ ਪ੍ਰਵਾਹ ਕੇ ਮ੍ਰਿਗ ਸੇ ਤ੍ਰਿਗ ਸੁੰਦਰ ਕਾਰੇ ਕੇ ਹਰਸੀ ਜੇ ਕੀ ਕਟ ਹੈ ਤਿਨਹੂ ਬਜਨਾਏ ਭਾਂਤ ਉਚਾਰੇ ਸੋ ਸੁਨ ਕਹਿ ਸਭ ਗਵਾਰਨੀਆਂ ਮਨ ਕੇ ਸਭ ਸੋਖ ਵਿਦਾ ਕਰ ਡਾਰੇ ਸੋਇਆ ਹਸ ਕਹਿ ਤਹਿ ਬਾਤ ਕਹੀ ਰਤ ਕੀ ਸੋ ਪ੍ਰਭਾਜਨੂ ਬੜਵੰਨ ਲੀਲੀ ਜੋ ਜਗ ਬੀਚ ਰਹਿਓ ਰਵ ਕੈ ਨਰ ਕੈ ਤਰ ਕੈ ਗਜ ਔਰ ਪਪੀਲੀ ਮੁਖ ਤੇ ਤਿਨ ਸੁੰਦਰ ਬਾਤ ਕਹੀ ਸੰਗ ਗਵਾਰਨ ਕੇ ਅਤ ਹੀ ਸੁਰਸੀਲੀ ਤਾ ਸੁਨ ਕੈ ਸਭ ਰੀਜ ਰਹੀ ਸੁਨ ਰੀਜ ਰਹੀ ਬਿਰਗ ਭਾਨ ਛਬੀਲੀ ਸੋਇਆ ਗਵਾਰਨੀਆ ਸੁਨ ਸਰਉਨਨ ਮੈਂ ਬਤੀਆ ਹਰ ਕੀ ਅਤ ਹੀ ਮਨ ਪੀਨੋ ਕੰਠ ਸਿਰੀ ਯਰ ਬੇਸ਼ਰਮ ਧਰੇ ਜੋ ਸੁੰਦਰ ਸਾਜ ਨਵੀਨੋ ਜੋ ਅਵਤਾਰਨ ਤੇ ਅਵਤਾਰ ਕਹ ਕਬ ਸ਼ਾਮ ਜੋ ਹੈ ਸੋ ਨਗੀਨੋ ਤਾਹੇ ਕਿਦੋ ਅਤ ਹੀ ਛਲ ਕੈ ਸੋ ਚੁਰਾਏ ਮਨਐ ਮਨ ਗੋਪਨ ਲੀਨੋ ਕਾਦਰ ਸੋ ਬ੍ਰਿਖ ਭਾਨ ਸੁਤਾ ਹਸ ਬਾਤ ਕਹੀ ਸੰਗ ਸੁੰਦਰ ਐਸੇ ਨੈਣ ਨਚਾਏ ਮਹਾ ਬ੍ਰਿਗ ਸੇ ਕਬ 시ਹਾਮ ਕਹੈ ਅਥੀ ਸੋ ਰੁਚੈ ਐਸੇ ਤਾ ਛਪ ਕੀ ਅਤਹੀ ਉਪਮਾ ਉਪਜੀ ਕਬ ਕੇ ਮਨ ਤੇ ਉਮਗੈ ਸੇ ਮਨਹੁ ਆਨੰਦ ਕੈ ਅਤਹੀ ਮਨੁ ਕੇਲ ਕਰੈ ਪਤੀ ਸੋ ਰਾਤੀ ਜੈਸੇ ਸੋਈਆ ਗਵਾਰਨ ਕਹੋ ਹਰਿ ਕੰਚਨ ਸੇ ਤਨ ਮੈਂ ਮਨ ਕੀ ਮਨ ਤੁਲ ਖੁਵਾ ਹੈ ਖੇਲਤ ਹੈ ਹਰ ਕੇ ਸੰਗ ਸੋ ਜਿਨ ਕੀ ਵਰਨੀ ਨਹੀਂ ਜਾ ਸੁਭਾ ਹੈ ਖੇਲਣ ਕਉ ਭਗਵਾਨ ਰਤੀ ਰਸ ਕੇਿਤ ਚਿਤ੍ਰ ਬਚਿਤ ਸਵਾ ਹੈ ਯੋ ਉਪਜੀਵ ਕੁਮਾ ਤਿਨ ਮੈਂ ਬ੍ਰਿਖ ਭਾਣ ਸੁਤਾ ਮਨੋ ਚੰਦਰ ਪ੍ਰਵਾਹ ਹੈ ਸੁਇਆ ਬ੍ਰਿਖ ਭਾਣ ਸੁਤਾ ਹਰਿਆ ਇਸ ਮਾਨ ਕੈ ਖੇਲਤ ਭੀ ਅਤ ਹੀ ਸ਼੍ਰਮ ਕੈ गहे हाथ सो हाथ रिया सब सुंदर नाचत रास बिखै ब्रमक तहे की सो कथा मन बीच विचार करै कभ श्याम कहि क्रमक मनो कोपन के कन सुंदर मै ब्रज भावन तामन जौ दमकै इंदौरा पिखकै नाचत रादका कृष्ण मनै सो पाए अति हुलास जत प्रेम छक मुरली उठो बजाए सोया नट नायक सुद्ध मलहार बिलावल लगवार नबीज तमार नगावे सोरठ सारंग राम कली सुविभास भले हित साथ बसावे गाव हो वै मृगनी त्रिको सु बुलावत है उपमा जी मानो पौहन को कस कह तनु नयनन के मनो तीर चलावे सैया मेघ मलहार ओ देवगंधार भले गौरी कर कै हित गावे ਜੈਤ ਸ੍ਰੀ ਯਰਵਾਰ ਸ੍ਰੀ ਨਟ ਨਾਇਕ ਸੁੰਦਰ ਭਾਤ ਬਸਾਵੈ ਰੀਜ ਰਹੀ ਬ੍ਰਿਜ ਕੀ ਸਭ ਗਵਾਰਨ ਰੀਜ ਰਹੇ ਸੁਰ ਜੋ ਸੁਨ ਪਾਵੇ ਔਰ ਕੀ ਬਾਤ ਕਹਾ ਕਹੀਐ ਤਜ ਇੰਦਰ ਸਵਾ ਸਭ ਆਸਨ ਖੇਲ ਦਰਾਸ ਮੈਂ ਸ਼ਿਆਮ ਕਹੈ ਅਤ ਹੀ ਰਸ ਸੰਗ ਤ੍ਰਿਆ ਮਿਲਤੀ ਨੋ ਚੰਦਰ ਭਗਾਰ ਚੰਦਰ ਮੁਖੀ ਬ੍ਰਿਖ ਭਾਂ ਸੁਤਾ ਸਜ ਸਾਜ ਨਵੀਨੋ अंजन ਆਖਨ दयबिंदुआ एकपाल में सेन्द्र सुंदर दीनो यो उपजी उपमात्री के शुभ भाग प्रकाशवए मनुकीनो स्वया खेल दुकान सो चन्द्र पगा कब श्याम कह रस जो उमै होए प्रीत करी अति हिते सो बहु लोगन को उहास सहोए मोतन माल अनन चंद्र मनो प्रगटे छपकाए अंधहार पतार गयो है इंदोरा गुवर्ण रूप निहार कै इउ उपजो जीव भाव राजत जो मह चांदनी कंजन सहत तलाव सुइया लोचन है जिनके सो प्रभा धार अनन है जिनको सम मैना कह कै कटाच चुराए लियो मन पै को जो रच्छिक तहैना ਕੇ ਹਰ ਜੀ ਜਿਨ ਕੀ ਕਠ ਹੈ ਸੁਖ ਪੋਤ ਸੋ ਕੰਠ ਸੋ ਕੋਕਿਲ ਬੈਨਾ ਤਾਹੇ ਲਿਓ ਹਰ ਕਹਿ ਹਰ ਕੋ ਮਨ ਪਹੁ ਹੁ ਨਚਾਏ ਨਚਾਏ ਕਹਿ ਨੈ ਨਾ ਸੋਇਆ ਕਾਨ ਬਿਰਾਜਤ ਗਵਾਰ ਨੋ ਐ ਕਲ ਸ਼ਾਮ ਕਹਿ ਜਿਨ ਕੋ ਕਛ ਭਾਉ ਨਾ ਤਾਤ ਕੀ ਬਾਤ ਕੋ ਨੈ ਸੁਮੈ ਜਿਨ ਕੇ ਸੰਗ ਭਰਾਤ ਕਰਿਓ ਬਨ ਗਉਨਾ ਤਾ ਲਟੈ ਲਟਕੈ ਤਨ ਜੋ ਸਾਧਨ ਕੇ ਮਨ ਗਿਆਨ ਦਿਵਹੁ ਨਾ ਚੰਦਰ ਪੈ ਉਪਜੀਵ ਉਪਮਾ ਮਨੁ ਲਾਗ ਰਹਿ ਅਹ ਰਾ ਦਿਨ ਛਾਉਨਾ ਸੋਇਆ ਖੇਲਤ ਹੈ ਸੋ ਗਵਾਰ ਨੂੰ ਮੈਂ ਜੋ ਉਪਰ ਪੀਤ ਜੋ ਸਿਰ ਸਤਰਨ ਕੇ ਹਰਤਾ ਜੋ ਸਾਧਨ ਕੋ ਪਰਦਾਨ ਦਿਵਉਨਾ ਬੀਚ ਰਿਓ ਜਗ ਕੇ ਰਵਕੇ ਕਲ ਸ਼ਾਮ ਕਹੈ ਜਿਹ ਕੋ ਪੁਨਖਉ ਨਾ ਰਾਜਤਿ ਯਉ ਵਲ ਕੈ ਤਿਨ ਕੀ ਮਨੁ ਚੰਦਨ ਲਾਗ ਰਹਿ ਅਹ ਛਾਉਨਾ ਸੋਇਆ ਕੀਰ ਸੇ ਨਾ ਕੋ ਰੰਗ ਸੇ ਦੈਨਨ ਢੋਲ ਤਹੈ ਸੋ ਬੀਜ ਤ੍ਰਿਆਮੈ ਜੋ ਮਨ ਸਤਰਨ ਬੀਜ ਰਵਿਓ ਜੋ ਰਹਿਓ ਰavi ਸਾਧਨ ਬੀਜ ਹੀ ਆਮੈ ਤਾ ਛਬ ਕੋ ਜਸ ਉਚ ਮਹਾ ਇਹ ਭਾਂ ਸੋ ਪੁਨ ਉਚਰੀ ਆਮੈ ਤਾਰਸ ਕੀ ਹਮ ਬਾਤ ਕਹੀ ਜੋ ਰਾਵਨ ਕੇ ਸੋ ਬਸੋ ਹੈ ਜੀ ਆਮੈ ਸੋ के रद संग ਕੇ के कव श्याम कह जो का नर काला राजत है सोई बीज करो सो विराजत है गिरदेति बाला ਫੂਲ रहे जह फूल भली बिद है अति जह जा चांद उजाला गोपीन नयनन की सोमन पहाड़ी भगवान सो कंजन माला दोहरा वर्णन चंद्र पगा कहो अति निर्मल कै बुद्ध उपमा ताहे तन और की सूरज सीख है शुद्ध श्याम की जा पिख श्याम कहे अद लाज है के फन जाल अटै है जा की प्रभा अति सुंदर पै शुभ पावन भाव सो वार सुटे है जे को पिख कै जन रीज रहै सो मुनीन के पेख ध्यान छुटे है राजत रादे अहीर तनौर के मानौ सूरज से प्रगटे हैं स्वैया ਖੇਲਤ ਹੈ ਸੋ ਗਵਾਰਨੁ ਮੈਂ ਜਿਹ ਕੋ ਬ੍ਰਿਜ ਹੈ ਅਤਿ ਸੁੰਦਰ ਡੇਰਾ ਜਾਹੀ ਕੇ ਨੈਨ ਪੁਰੰਗ ਸੇ ਹੈ ਜਸੁਦਾ ਜੂ ਕੋ ਬਾਲਕ ਨੰਦ ਹੈ ਕੇਰਾ ਗਵਾਰਨ ਸੋ ਤਹ ਕੇਰ ਲਿਓ ਕਹਿ ਬੇ ਜਸ ਕੋ ਉਮਗਿਓ ਮਨ ਮੇਰਾ ਮਨਹੁ ਮੈਨ ਸੋ ਖੇਲਨ ਕਾਜ ਕਰਿਓ ਮਿਲ ਕੈ ਮਨੋ ਚਾਂਦਨ ਘੇਰਾ ਗਵਾਰਨ ਰੀਜ ਰਹੀ ਹਰ ਪੀਖ ਸਬੈ ਤਜ ਲਾਜ ਸੋ ਔਰ ਡਰ ਸਾਸੋ आई है त्याग सोउ ग्रह पै परतार कहै ना कछु कह मासो ढोरत है सो ताल बजाए कह गावत है कर कह उपहासो मोहे गिराय धर पै सो त्रिया कब श्याम कह चितवै हरि जासो स्विया जो जुगतीसर है करता जो है तन पै धरिया पट पीले जाहे छरियो बलराज बलि जिन सत्र हने कर कोप हठीले ਗਵਾਰਨ ਜੀਜ ਰਹੀ ਧਰਨੀ ਜੋ ਧਰੇ ਪਟ ਪੀਤਨ ਪੈ ਸੋ ਰੰਗੀਲੇ ਜੋ ਮ੍ਰਿਗਨੀ ਸਰ ਲਾਗ ਗਿਰੈ ਇਹ ਧਿਉ ਹਰ ਦੇਖਦ ਨੈਨ ਰਸੀਲੇ ਸੋਇਆ ਕਾ ਸੁਖ ਕੋ ਕਰ ਕੈ ਤਨ ਮੈ ਸਿਆਮ ਹੀ ਸੋ ਅਤਹੀ ਹਿਤ ਕੈ ਚਿਤ ਕੈ ਨਹ ਬੰਧਨ ਹੋ ਧਨ ਮੈ ਧਰ ਰੰਗਨ ਬਸਤਰ ਸਵੇ ਤਹ ਢੋਲਤ ਜੋ ਉਪਮਾ ਉਪਦੀ ਮਨ ਮੈ ਜੋ ਫੂਰ ਮੁਖੀ ਤਾ ਪੂਲ ਕੈ ਖੇਲਤ फूल सी होए गई बन मैं सोया सब खेंत है मन आनंद ਕੋ भगवान को धार सवै मन में हर के चित्तبيه की रही सुध एक ना और रही ना कछु तन में नहीं पूतल में अर बातन में इन सो नहीं दे मन के गण में सो रीज सो श्याम कहत ही फुन হাস গয়ে ভগবান কহি বতিয়া বৃখপান সুতা পিখ রূপ নবীনো अंजन आठ তরে পুন বে শিরภาব সবে জিন ভামন কিনো সুন্দর সেনদর কো জিন লহ করি পাল বিখয় বিন্দু আ এক দীনো নয়ন না চায় মনয় সুপায়ে चितय जद राए तब फस दीनो सुइया বীণ সি গ Varn গাবত হ শুনবে अनन है जिनको सस सो सो विराजत कंजन से दिगभारे झाजन ताकी उठी तarpै तुन को कब श्याम उचारे ढोलक संग तंबूरन होए उठे तह बाज मृदंग नगारें खेलत ग्वारन प्रेम छकी कब श्याम कहे का संग कानरकारे छाजत जा मुख चंद प्रभा समराजत कंजन से दिगभारे ਜਾ ਇਕ ਕੰਦਰਪ ਰੀਹ ਜਿਹ ਰਹਿ ਪਿਖੇ ਜਿਹਕੇ ਮਿਰਗ ਆਦਿਕ ਹਾਰੇ ਕੇਹਰ ਕੋਕਲ ਕੇ ਸਭ ਭਾਵ ਕਿਦੋ ਈਨ ਭੈ ਗਨ ਉਪਰਿ ਵਾਰੇ ਸਈਆ ਜਾਹੇ ਬਵੀਛਨ ਰਾਜ ਦੀਓ ਜਿਨ ਹੂ ਪਰ ਰਾਮਨ ਸੋਰਿ ਪ੍ਰਸਾਧੋ ਖੇਲਤ ਹੈ ਸੋ ਭੂਮ ਬਿਖੈ ਬ੍ਰਿਜਲਾਜ ਕੋ ਤਜ ਬਾਦੋ जाहे निकास लयो मुरप्राण सो माप लियो बाल को तन अधो श्याम कह संगवारन के अति ही कह सो खेरत माधो सवैया जो मुर नाम हारित कुप कह अत ही डरैया भुन पीरन जो गज संकट को कटिया हरता जो साधन के दुख पीरन सो बृजमय जमुना तट पै कब श्याम कहे हरिया त्रिय चीरन ता कर कै रस को चस को भांत कहो गण बी चाहीरन